ਸਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਵਿਦੇਸ਼ ਫਿਰ ਨਿਤ ਚੂਰੇ ਸਮਾਲੇ ਮਿਲਦੇ ਆ ਢਿੱਲ ਨਾ ਹੋ ਜੇ ਨੀਅਤ ਰਾਸ ਕਰੇ ਦੇਖੋ ਫਿਰ ਘਰੇ ਹੀ ਆ ਬੁੱਧ ਵੀ ਮੇਰਾ ਗਿਆ ਹੋਇਆ ਜਾਣੇ ਜਿਹਨੂੰ ਮਿਲਣਾ ਆਪਣੇ ਮੋਰੂੰ ਨਨ ਨਾ ਪੂਰਾ ਰਮਹਰੀ ਇਹ ਹੈ ਉਹ ਹੈ ਜਿਹੜੀ ਦੂਜੀੋ ਕਥਾ ਦੇ ਉਹ ਕਹਿੰਦੇ ਤਨ ਪਰ ਕਾਇਕ ਸੰਗ ਹੀ ਬਾਸਾ ਵਿੱਚ ਆਵੇ ਭੀਤ ਕਰਾਰੀ ਇੱਕ ਤਾਂ ਇਹ ਪੰਕਤੀ ਉਹ ਕਹਿੰਦੇ ਕੋਈ ਤੇ ਤੇ ਕਹਿੰਦੇ ਅਸੀਂ ਹਰ ਵਕਤ ਬਸਦੇ ਆ ਅੱਖ ਖੁੱਲੀ ਕਹਿੰਦੀ ਪਰ ਉਹ ਮੇਰੇ ਕੋਲ ਅੱਖ ਨਹੀਂ ਸੀ ਦੇਖਣ ਲਈ ਉਹ ਅੱਖ ਖੁੱਲ੍ਹੀ ਹੈ ਤੀਸਰੀ ਜਦੋਂ ਬੁੱਧੀ ਬੇਬੇਖ ਬੁੱਧੀ ਚ ਬਗਲੀ ਤਾਂ ਦਿਖਿਆ ਕੋਣੀ ਸੀ ਉਹ ਤਾਂ ਘਰੇ ਹੀ ਸੀ ਆਨ ਤੁਸੀਂ ਵਿਦੇਸ਼ ਘਰ ਬੈਠੀ ਉਹ ਵਿਦੇਸ਼ ਚਲੀ ਗਈ ਤੇ ਗੁੱਡੀ ਚ ਗਈ ਤਾਂ ਅੱਖਾਂ ਨੂੰ ਬਾਹਰ ਗਈ ਨਾ ਸੁਰਤ ਹਾਂਜੀ ਨਾਲ ਕੰਨਾ ਨਾਲ ਬਾਹਰ ਜੁੜਦਾ ਵਿਦੇਸ਼ ਹੋ ਗਈ ਘਰ ਬੋਟ ਇਹ ਅੰਦਰ ਨੂੰ ਦੇਖਦੀ ਤਾਂ ਤੇ ਅੰਦਰ ਹੈ ਦੇਖੇ ਤਾਂ ਸਹੀ ਅੰਤਰਮੁਖੀ ਹੋਇਆ ਤਾਂ ਉਹਦਾ ਘਰੇ ਹੀ ਸੀ ਉਹਦਾ ਸੁਪਨਾ ਆਇਆ ਸੀ ਜਦੋਂ ਸੋਆ ਇਕੱਠੇ ਅਸਲ ਸੋਇਆ ਤੇ ਆਪ ਘਰੀ ਉਹ ਹੋ ਗਿਆ ਸੁਪਨੇ ਤੇ ਤਾਂ ਸੁਪਨਾ ਉਹ ਕਹਿ ਰਹਿਣ ਗੱਲ ਇਹ ਵੀ ਘਰ ਹੈ ਉਹ ਵੀ ਘਰ ਹੈ ਘਰ ਬੈਠੀ ਹੋਈ ਪਰਦੇ ਕੱਢੀ ਹੋਈ ਉਹ ਵਿਦੇਸ਼ ਦੀ ਬੈਠੀ ਹੈ ਚੂਰਦੀ ਹੈ ਕੋਈ ਬਲੂ ਕਵੇ ਬਲੂ ਆ ਗੱਲ ਕਹਿ ਰਹੇ ਨੇ ਤਾਂ ਘਰ ਹੀ ਮੁੰਦ ਮੁੰਦ ਦਾ ਭਾਵ ਹੈਗਾ ਵੀ ਘਰ ਵਾਲਾ ਅਰ ਔਰ ਤੁਦਵਾਲੀ ਅੱਛਾ ਜੀ ਅਗੇ ਪੇਰਾ ਆ ਗਿਆ ਨਾ ਠੀਕ ਹੈ ਜੀ ਵਿਦੇਸ਼ ਪਿਰ ਆਪਣੇ ਨੂੰ ਵਿਦੇਸ਼ ਹੋ ਗਈ ਏ ਵੀ ਉਹ ਵਿਦੇਸ਼ ਗਿਆ ਹੋਇਆ ਮੇਰਾ ਜਿਵੇਂ ਕਿਸੇ ਦਾ ਪਤੀ ਵਿਦੇਸ਼ ਗਿਆ ਹੋਵੇ ਠੀਕ ਹੈ ਜੀ ਤੇ ਨਿਤ ਝੂਰੇ ਸੰਮਾਲੇ ਇਹ ਜਿਹੜਾ ਸੰਮਾਲੇ ਲਿਖਿਆ ਆ ਸਮਝਾਣੇ ਮਤਲਬ ਹੈ ਸੁਭਾਲਦੀ ਹੈ ਵੀ ਸੁਭਲਦੀ ਹੈ ਜੇ ਸੰਭਾਲੇ ਆ ਉਹਦੇ ਨਾਲੋਂ ਅਲੱਗ ਅੱਖਰ ਹੈ ਸਮਾਜਣਾ ਹੋਰ ਗੱਲ ਹੈ ਆ ਇਹ ਸੰਭਾਲੇ ਇਹ ਸਾਂਭਣ ਦੀ ਗੱਲ ਪਰ ਗਿਆਨ ਤੇ ਬਿਨਾਂ ਨੀ ਨਾ ਅੱਖ ਵੀ ਨਾ ਖੁੱਲੀ ਤੀਜੀ ਬਿਲਦਿਆਂ ਢਿਲ ਨਾ ਹੋਵੇ ਜੇ ਨੀਅਤ ਰਾਸ ਕਰੇ ਬਿਲਦਿਆਂ ਤੇ ਰੋਣਾ ਹੋਵੇ ਉਹ ਮਿਲਣਾ ਕਿੱਥੇ ਉਹ ਤਾਂ ਇੱਕ ਇੱਕ ਸ਼ੰਗੀ ਬਸ ਨੀਅਤ ਤੇਰੀ ਰਾਸ ਨਹੀਂ ਹੈ ਵਾਇਆ ਨੂੰ ਛੱਡਣ ਨੂੰ ਅਜੋ ਤਿਆਰ ਨਹੀਂ ਵਾਇਆ ਦਾ ਜੋ ਜੀ ਗੁਰਬਾਣੀ ਨੂੰ ਮੰਨਣ ਨੂੰ ਕਿਹਾ ਨਹੀਂ ਅਜੋ ਪਿੱਛਾ ਤਾਂ ਹੈ ਮਿਲ ਜਵੇ ਦੋਈ ਅਸੀਂ ਦੋ ਹੱਥਾਂ ਦੇ ਸੁਰਗ ਨੂੰ ਵੀ ਚਲਾ ਜਾਵਾਂ ਇਹ ਨਹੀਂ ਹੁੰਦਾ ਪਰ ਨੂੰ ਜਾ ਹੁੰਦਾ ਫਰਕ ਹੈ ਜੀ ਮਹੱਲਾ ਬਾਜ ਪ੍ਰੀਤ ਕਰੇ ਤਿੱਚਰ ਜਾਣੇ ਭਲਾ ਕਰ ਜਿੱਚਰ ਲੇਵੈ ਦੇ ਦੇਖੋ ਕਹਿੰਦਾ ਮੈਂ ਝੂਠੀਆਂ ਗੱਲਾਂ ਕਰੀ ਜਾਂਦੇ ਨੇ ਜਿਹੜੇ ਜਿੱਦੇ ਵੀ ਧਰਮ ਕਾਦਮੀ ਦੇ ਵੀ ਮੈਨੂੰ ਜੀਪ ਵਲੇ ਆਦੀ ਵਿਛੋੜਾ ਜੀ ਮੇਰਾ ਜੀ ਐ ਕਰਦਾ ਬਿਲਕੁਲ ਝੂਠੀਆਂ ਗੱਲਾਂ ਕੁੜੀਆਂ ਗੱਲਾਂ ਨੇ ਕਰਦੇ ਪ੍ਰੀਤ ਨਹੀਂ ਹੈ ਅੰਦਰ ਤੁਹਾਡੇ ਵਿਲੇ ਕਿ ਉੱੰਦਰ ਪ੍ਰੀਤ ਨਹੀਂ ਹੈ ਮੂਹ ਦੇ ਵਿੱਚ ਕੁਝ ਹੋਰ ਹੈ ਮਨ ਵਿੱਚ ਕੁਝ ਹੋਰ ਹੈ ਕੱਚੇ ਸੇਖਾਂ ਦੇ ਕੱਚਿਆਂ ਅੰਦਰ ਪ੍ਰੀਤ ਹੋਵੇ ਉਹਦਾ ਢਿੱਲੋ ਨਹੀਂ ਲਾਉਂਦਾ ਬਿਰਸ ਜਿੱਲ ਖਾਦੀ ਹੈ ਢਿੱਲ ਤੁਹਾਡੀ ਪ੍ਰੀਤ ਦੀ ਹੈ ਘਾਟਾ ਤੁਹਾਡੀ ਪ੍ਰੀਤ ਦਾ ਤਿਆਰ ਹੈ ਲੈਣ ਵਾਲਾ ਤਿਆਰ ਨਹੀਂ ਹੈ ਠੀਕ ਤਸਕਰ ਜੋ ਨਾਮ ਬਾਣੀ ਕਹਦੀ ਹੈ ਗੁਰਬਾਣੀ ਤੇ ਬੰਦੇ ਨੇ ਰੋਕ ਠੀਕ ਹੈ ਗੁਰੂ ਅਗੇ ਭਗਤ ਅਗੇ ਕਿੰਨਾ ਕਹਿੰਦੇ ਮਤੇ ਫਲਾਹ ਉਹਦੇ ਵਿੱਚ ਹੈ ਜੇ ਮਨ ਦੇਵੇ ਦੇ ਰਾਮ ਨਿਓ ਹੈ ਮੋਲ ਕੰਚਨ ਸੋ ਪਾਈਏ ਨਹੀਂ ਤੋਲ ਉਹ ਤੁਸੀਂ ਤਾਂ ਮੁੱਲ ਰਣਜੀਤ ਸਿੰਘ ਨੇ ਸੋਨਾ ਦੇ ਲਾ ਕੇ ਸੋਨਾ ਲਾ ਕੇ ਨਹੀਂ ਮਿਲਦਾ ਹੈ ਜੀ ਦੇ ਦੇ ਬਦਲੇ ਨਹੀਂ ਮਿਲਦਾ ਹੈ ਇਹ ਕੰਚਨ ਸੋ ਪਾਈਏ ਨਹੀਂ ਤੋਲ ਸੋਨੇ ਦੇ ਤੋਲ ਬਰਾਬਰ ਭਾਰ ਤੋਲਦੇ ਤੇ ਜਿਹੜੇ ਸੋਨਾ ਦਾਨ ਕਰਦੇ ਤੇ ਉਹਨਾਂ ਨੂੰ ਵੀ ਕੁਝ ਮਿਲਿਆ ਮੰਨਦੇ ਰੰਗ ਮੰਨਤਾ ਦਿੱਤਾ ਦੀ ਮੰਨ ਦੇ ਪਾਸ ਤੇ ਬੁੱਢਣਾ ਕੀਏ ਕੋਈ ਦੇਣਾ ਪੈਂਦਾ ਤਾਂ ਮਿਲਦਾ ਜੋ ਦੇਵੇ ਮਾਨੂ ਅੱਛਾ ਹਾਂਜੀ ਪੌੜੀ ਜਿੰ ਉਪਾਏ ਜੀ ਤਿੰਨ ਹਰ ਰੱਖਿਆ ਅਮਰੇ ਸੱਚਾ ਨਾਮ ਭੋਜਨ ਚੱਖਿਆ ਜੀ ਪਹਿਲਾਂ ਕੀਤੇ ਨੇ ਹਾਂਜੀ ਸਾਰੇ ਹੁ ਪਰਮੇਸ਼ਰ ਨੇ ਉਹੀ ਪਰਮੇਸ਼ਰ ਰੱਖਣ ਵਾਲਾ ਹੈ ਬਚਾਉਣ ਵਾਲਾ ਹੈ ਹੋਰ ਕੋਈ ਤੇ ਵੀ ਦੇਤੇ ਬਣਦੀ ਫਿਰਦੇ ਹੋ ਪਰਮੇਸ਼ਰ ਹਰ ਦੀ ਰੱਖਿਆ ਕਰ ਰਿਹਾ ਠੀਕ ਹੈ ਜੀ ਕਿੰਨੀ ਉਪਾਏ ਜੀ ਤੈਨੇ ਹਰ ਰੱਖਿਆ ਅੰਮ੍ਰਿਤ ਸੱਚਾ ਨਾਉ ਭੋਜਨ ਚੱਖਿਆ ਉਹਨਾਂ ਨੇ ਭੋਜਨ ਚੱਖਿਆ ਆਪੀ ਚਖਿਆ ਹੀ ਨਹੀਂ ਕਿਸੇ ਨੇ ਜੇ ਮਰ ਕੇ ਮਨੂ ਚਖੂਗਾ ਜਾਂ ਸੱਚੀ ਮਿੱਠਾ ਲੱਗੂਗਾ ਜਿਹਨੂੰ ਗੁਰਬਾਣੀ ਉਹ ਨਾਲ ਨਹੀਂ ਗੱਲ ਬਣਦੀ ਤਾਨ ਕਰ ਨਾਲ ਨਹੀਂ ਗੱਲ ਬਣਦੀ ਸੁੰਨਾ ਚੜਾਉਣਾ ਨਹੀਂ ਰੇ ਜੋ ਆਰਾ ਨਾਲ ਸਹੀ ਗੱਲ ਬਣਦੀ ਬੰਨ ਰੇ ਨਾਲ ਗੱਲ ਬਣਦੀ ਠੀਕ ਹੈ ਤ੍ਰਿਪਤ ਰਹੇ ਗਾਏ ਮਿੱਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਕਿਨੇ ਵਿਰਲੇ ਲਖਿਆ ਤ੍ਰਿਪਤ ਰਹੇ ਆਗਾਏ ਜਿਹੜੇ ਗੁਰਮੁਖ ਨੇ ਮੰਨ ਲੈਂਦੇ ਨੇ ਉਹ ਤਾਂ ਤ੍ਰਿਪਤ ਰਹਿੰਦੇ ਨੇ ਮਾਦੀ ਦੀ ਨਹੀਂ ਉਹਨਾਂ ਨੂੰ ਨਾ ਤੇ ਲੈਣਾ ਕੀ ਹੈ ਸਭ ਬਾਯਾ ਹੈ ਉਹ ਜਿਹੜੀ ਪਪਾਖਿਆ ਨਾ ਇੱਕ ਪਾਖਿਆ ਹੁੰਦੀ ਆ ਇੱਕ ਪਪਾਖਿਆ ਹੁੰਦੀ ਆ ਪਟਕਣਾਂ ਦੀ ਭੁੱਖ ਦੀ ਬੰਦੀ ਬਸ ਤੇ ਬੰਦੀ ਜਿਹੜੀ ਪਟਕਣਾਂ ਆ ਉਹ ਭੁੱਖ ਸਭ ਅੰਦਰ ਇੱਕ ਵਰਤ ਹੈ ਕਿਨੇ ਵਿਰਲੇ ਲਖਿਆ ਸਭੇ ਕੜਾਂ ਉਹ ਤਾਂ ਸਾਲਿਆਂ ਦੇ ਅੰਦਰ ਰਹੇਗਾ ਪਰ ਕਿਸੇ ਵਿਰਲੇ ਦੀ ਦੇਖਿਆ ਪਛਾਣਿਆ ਅੰਦਰੋਂ ਦਾ ਦਾ ਬਹਾਲ ਨੂੰ ਦਰਸ਼ਨ ਵੀ ਬਾਹਰੋਂ ਕਾਲ ਨੂੰ ਚਾਹੁੰਦਾ ਹੈ ਲਿਖੇ ਦੀ ਹੋਏ ਗੁਰੂ ਨਾਨਕ ਦੇ ਦਰਸ਼ਨ ਦੇ ਬਾਹਰੋਂ ਨਹੀਂ ਹੋਏ ਵਿਰੋਧ ਕੀਤਾ ਹੋਇਆ ਹੈ ਅੰਦਰ ਵਰਤਦਾ ਹੈ ਦੇ ਲਖਿਆ ਕਿਸੇ ਪਾਖਿਆ ਬਸ ਕਰਨ ਜਿਹਨਾਂ ਨੇ ਦੇਖ ਲਿਆ ਪ੍ਰਭ ਨਿਹਾਲ ਹੋ ਗਏ ਉਹ ਨਿਹਾਲ ਖੁਸ਼ੀ ਦੀ ਅੰਤ ਜਿਹੜਾ ਨਿਹਾਲ ਹੋ ਜਾਂਦਾ ਲੋ ਠੀਕ ਹੈ ਜੀ ਪੱਕਿਆ ਅੰਤ ਖੁਸ਼ੀ ਨਿਹਾਲ ਨਿਹਾਲ ਨਿਹਾਲ ਨਿਹਾਲ ਨਿਹਾਲ ਚਾਰ ਵਾਰ ਆਇਆ ਹੋਇਆ ਪਵਿੱਤਰ ਪਵਿੱਤਰ ਪਵਿੱਤਰ ਪੁਰੀਤ ਪੁਰੀਤ ਨਿਹਾਲ ਹੈ ਪਵਿੱਤਰ ਪਵਿੱਤਰ ਮਾਇਆ ਚਾਰ ਆਇਆ ਹੋਇਆ ਠੀਕ ਹੈ ਜੀ ਜਨ ਨਾਨਕ ਭਾਏ ਨਿਹਾਲ ਕਹਿੰਦਾ ਭਾਵਾ ਵੀ ਜਿਹੜੇ ਜਨ ਹੈ ਉਹੀ ਨਿਹਾਲ ਹੋਏ ਹੈ ਜੀ ਸਭ ਦਾ ਚਾਰੇ ਪਦਾਰਥ ਮਿਲ ਕੇ ਨਿਹਾਲ ਨੇ ਹੋ ਠੀਕ ਹੈ ਜੀ ਹਾਂ ਜੀ ਇੱਥੇ ਪੌੜੀ ਦੀ ਸਮਾਪਤੀ ਹੈ ਜੀ ਜੀ